ਤਾਂ ਕਬੀਰ ਜੀ ਦੀ ਬਾਵਨ ਅਖਰੀ ਹੈ ਜੀ ਸੱਸੇ ਅਖਰ ਉਪਦੇਸ਼ ਸੱਸਾ ਸੋ ਨੀਕਾ ਕਰ ਸੋਧੋ ਘਟ ਪਰਚਾ ਕੀ ਬਾਤ ਨਿਰੋਧੋ ਘਟ ਪਰਚਾ ਜੋ ਉਪਜੇ ਭਾਉ ਪੂਰ ਰਹੇ ਹੋ ਤਾਂ ਤ੍ਰਿਪੋ ਬਣਰਾਓ ਸੋਧੋ ਉਹਨ ਉਸ ਹੈਗਾ ਸਤਪੁਰ ਖਾਜੋ ਜੋ ਤਾਂ ਜਿਹੜੀ ਉਹਨਾਂ ਨੂੰ ਕਰਕੇ ਸ਼ੁੱਧ ਕਰ ਲੋ ਨਿਰੋਲ ਕਰ ਲੋ ਉਹ ਮਾਇਆ ਤੋਂ ਰਹਿਤ ਕਰ ਲੋ ਮਾਇਆ ਤੋਂ ਅਲੱਗੋ ਜਿਹੜਾ ਉਹਦਾ ਸਰੂਪ ਹੈ ਸ਼ੁੱਧ ਸਰੂਪ ਉਹਨੂੰ ਪਰਚਾ ਕੀ ਬਾਤ ਨਿਰੋਧੋ ਸਾਡਾ ਅੰਦਰ ਆਇਓ ਸਾਰਿਆਂ ਦੇ ਅੰਦਰ ਪਰਚਾ ਪਾਓ ਨਿਰੋਧ ਉਹ ਹੁੰਦਾ ਹੈ ਜਿਹਦਾ ਕੋਈ ਵਿਰੋਧ ਨਾ ਕਰ ਸਕੋ ਸੱਟ ਪਰਚਾ ਅੰਦਰੇ ਪਰਚਾ ਰਹੇ ਬਾਹਰ ਮਿਰੋਧੋ ਛੱਟ ਪਰ ਕੇ ਜੋ ਉਪਜੇ ਭੌ ਛੱਟ ਪਰ ਕੇ ਦੇ ਵਿਚਕੇ ਥੋੜੇ ਅੰਦਰ ਭੌ ਪੈਦਾ ਹੋ ਗਿਆ ਨਾ ਫਿਰ ਅੰਦਰੋਂ ਇਹਨੇ ਸੁਰਤ ਨੇ ਹਟਾਈ ਨਹੀਂ ਹਟਾਈ ਨਹੀਂ ਹਟਾਈ ਇਹ ਅੰਤ ਕੇ ਸੁਰਤ ਨੇ ਹੋਵੇ ਬਾਹਰ ਨੂੰ ਜਾਣਾ ਹੀ ਨਹੀਂ ਜੋ ਭੌ ਪੈਦਾ ਹੋ ਗਿਆ ਹਾਂਜੀ ਪੂਰ ਰਹੇ ਹੋ ਤਾਂ ਤ੍ਰਿਪੂਣ ਰਾਇਓ ਹਾਂ ਪੂਰ ਰਹੇ ਪੂਰਾ ਹੋ ਰਿਹਾ ਅੰਦਰ ਛੁੱਟ ਜੁੜ ਜਾਂਦੀ ਆ ਤੇ ਪੂਰਨ ਰੂਪ ਉਹਦਾ ਪੂਰਨ ਬ੍ਰह्म ਹੋ ਜਾਂਦਾ ਦੂਜਿਆਂ ਨੂੰ ਪੂਰਾ ਕਰਨ ਵਾਲਾ ਹੋ ਜਾਂਦਾ ਫਿਰ ਉਹ ਦੂਜਿਆਂ ਨੂੰ ਉਹਦਾ ਕੋਈ ਇਨਾਂ ਧਿਆਨ ਵੰਡਣ ਵਾਲਾ ਹੋ ਜਾਂਦਾ ਪੂਰ ਰਹੇ ਗਾਂ ਤੇ ਗਾਂ ਉਹ ਦੇਖੋ ਜੋ ਪੈਸੇ ਜਾ ਰਹੇ ਫਿਰ ਉਹਨੋ ਕੋ ਮੈਸੇਜ ਫਿਰ ਨਾਮ ਦਾ ਆ ਰਿਹਾ ਹੈ ਉਹਨੂੰ ਗਿਆਨ ਹੋਣ ਲੱਗ ਜਾਂਦਾ ਆਪੇ ਸੋਝੀ ਆਉਣ ਲੱਗ ਜਾਂਦੀ ਆ ਲੁੱਭੀ ਪੂਰੀ ਹੋ ਜਾਂਦੀ ਆ ਉਹਦੇ ਨਾਲ ਜੁੜ ਕੇ ਜੇ ਸੁਰ ਤੋਂ ਨਾਲ ਜੁੜੀ ਰਹਿੰਦੀ ਹੈ ਸਮਝ ਆਉਂਦੀ ਰਹਿੰਦੀ ਹੈ ਜਿਆਦਾ ਜਿਆਦਾ ਜਿਆਦਾ ਜਿਆਦਾ ਸਮਝ ਆਈ ਜਾਂਦੀ ਆ ਇਹ 39ਵੀਂ ਪੌੜੀ ਦਾ ਉਪਦੇਸ਼ ਹੈ ਜੀ ਇੱਕ ਵਾਰ ਫੇਰ ਸ ਅੱਖਰ ਦਾ ਉਪਦੇਸ਼ ਹੈਗਾ ਜੀ ਗੋੜੀ ਭਵਨ ਅਕਰੀ ਕਬੀਰ ਜੀਓ ਕੀ ਜੋ ਸ ਸ ਸੂ ਸ ਸੇਜ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ ਆਂ ਸ ਹੈ ਉਹੀ ਸੋ ਹੈ ਉੱਥੇ ਵੀ ਉਹੀ है, इथे भी ਉਹੀ ਲਫਜ਼ ਆਇਆ सो, ਸੋ ਸੋ ਹੋ ਆਜੋ ਜਿਸ ਸਵਾਰਾ ਜੋ ਹਿਰਦੇ ਨੂੰ ਸ਼ੁੱਧ ਕਰੇ ਹਿਰਦੇ ਨੂੰ ਸਾਫ ਕਰੇ ਜਿਹੜਾ ਉਹ ਕੌਣ ਹੈ ਉਹ ਸੱਚ ਹੈ ਤੇ ਸੱਚ ਸਮਨਾ ਕ ਖਸਮ ਸੋ ਨੂੰ ਮੰਨੋ ਜਿਹੜਾ ਹਿਰਦੇ ਨੂੰ ਸ਼ੁੱਧ ਕਰੇ ਸੋ ਸੋ 6 ਸਵਾਰਾ ਹੈ ਹਾਂਜੀ ਸੋ ਹੀ ਸਹੀ ਸੰਦੇਹ ਨਿਵਾਰ ਹੈ ਸਹੀ ਤਰੀਕੇ ਨਾਲ ਸਾਰੀਆਂ ਸ਼ੰਕਾਵਾਂ ਸੱਚੇ ਦੂਰ ਕਰ ਸਕਦਾ ਉਹੀ ਸ਼ੰਕਾਵਾਂ ਦੂਰ ਕਰੂਗਾ। ਵਰਨਾ ਸੰਦੇਹ ਦੂਰ ਹੋਏ ਸ਼ੰਕਾਵਾਂ ਨਹੀਂ ਦੂਰ ਹੋਣਗੇ। ਹਾਂਜੀ। ਅਲਪ ਸੁਖ ਛਾੜ ਕਹਾਵਾ। ਜਦੋਂ ਅਲਪ ਸੁਖ ਦੁਨਿਆਵੀ ਸੁਖਾਂ ਨੂੰ ਛੱਡ ਕੇ ਦੁਨਿਆਵੀ ਸੁਖਾਂ ਦੀ ਡਿਮਾਂਡ ਇਹਦੀ ਨੂੰ ਛੱਡ ਕੇ ਪਰਮ ਸੁਖ ਦੀ ਇੱਛਾ ਇਹਦੇ ਅੰਦਰ ਪੈਦਾ ਹੋ ਜਵੇ ਪਰਮ ਸੁਖ ਪਾਵਾਂ ਤਾਰੇ ਨੂੰ ਖੁਦ ਦੀ ਪ੍ਰਾਪਤੀ ਹੋ ਜਵੇ ਫਿਰ ਇਹ ਤ੍ਰਿਆ ਉਹ ਕੰਤ ਕਹਾਵਾ ਇਹ ਬੁੱਧੀ ਤ੍ਰਿਆ ਹੋ ਜਾਂਦੀ ਹੈ ਗੁਰਮੁਖੀ ਹੋ ਜਾਂਦੀ ਹੈ ਉਹਨੂੰ ਫਿਰ ਕੰਤ ਕਰਨ ਲੱਗ ਜਾਂਦੀ ਹੈ ਫਿਰ ਰਸਾ ਬਦਲ ਜਾਂਦਾ ਸੱਚ ਕੰਤਾ ਫਿਰ ਸੱਚ ਖਸਮ ਸੱਚ ਖਸਮ ਨਾਲ ਕ ਬਣਦਾ ਹੁਕਮ ਜਿਹੜਾ ਕੰਤਾ ਹੈ ਜਿਹੜੀ ਬੁੱਧਾ ਬ विवेक ਬੁੱਧੀ ਹੈ ਉਹ ਤ੍ਰਿਆ ਜੀ ਉਹਨੇ ਜੀਵ ਇਸਤਰੀ ਨਹੀਂ ਹੁੰਦੀ ਇਹ ਜੀਵ ਨਹੀਂ ਉਦੋਂ ਰਿਹਾ ਜੀ ਮਰ ਜਾਂਦਾ ਹੁੰਦਾ ਜੀਵ ਇਸਤਰੀ ਜੀਵ ਇਸਤਰੀ ਕਹੀ ਜਾਂਦਾ ਜੀਵ ਦਾ ਪ੍ਰਿੰਦ ਲਾਵਾ ਨਾਲ ਹੁੰਦਾ ਪਤਾ ਨਹੀਂ ਕੀ ਆਤਮਾ ਇਸ ਗੁਰਮੁਖੀ ਲਾਵਾ ਆਇਆ ਸਿਆਰੀ ਨਾਲ ਪੂਰਨ ਬੁੱਧੀ ਜਿਹੜੀ ਹੁੰਦੀ ਆ ਉਹ ਵੇਖ ਬੁੱਧੀ ਉਹ ਹੈ ਹਾਂ ਤਬ ਇਹ ਤ੍ਰਿਆ ਇਹ ਕੌਣ ਹੈ ਜੀ ਵੇਖ ਬੁੱਧੀ ਤ੍ਰਿਆ ਹੋਗੀ ਉਹ ਕੰਤ ਕਹਾਉਂ ਵਾ ਸ਼ਬਦ ਗੁਰੂ ਕੰਤ ਹੈ ਠੀਕ ਹੈ ਇਹਨਾਂ ਦਾਪਸ ਚ ਜੀ। ਇੱਕ ਵੀਰ ਉਹਦੇ ਵਿਆਹ ਚਲੇ ਜਾ ਪਰਖੇ ਇੱਕ ਭਗਵਾਨਾ। ਠੀਕ ਜੀ। ਹਾਂਜੀ ਸੱਸੇ ਸ਼ਬਦ ਤੋਂ ਉਪਦੇਸ਼ ਹੈ ਜੀ ਗੁਰੂ ਨਾਨਕ ਸਾਹਿਬ ਦੀ ਪੱਤੀ ਚੋਂ। ਓਨਾ ਦੀ ਪਹਿਲੀ ਪੌੜੀ ਅਸਲ ਚੇ। ਸ੍ਰਿਸ਼ਟ ਜਿਨੂੰ ਸਾਜੀ ਸਭਨਾ ਸਾਇਬ ਸੇਵਤ ਰਹੇ ਚਿੱਤ ਜਿਨ ਕਾ ਲਾਗਾ। ਆਇਆ ਤਿੰਨ ਕਾ ਸਫਲ ਪਇਆ ਸੱਜਾ ਸੋਈ ਸੱਜ ਜਿਨ ਸਾਜੀ ਉਹੀ ਐ ਜਿਨੇ ਸਾਜੀ ਐ ਇੱਕ ਜਿਹਨੂੰ ਅਸੀਂ ਕਹਿੰਨੇ ਆ ਉਹੀ ਕਹੈ ਗੱਲ ਕਰਦੇ ਆਂ ਅਸੀਂ ਸੱਜਾ ਸੋਈ ਸੱਜ ਜਿਨ ਸਾਜੀ ਸਬਨਾ ਸਾਹਿਬ ਏਕ ਪਇਆ ਉਹੀ ਇੱਕ ਸਬਨਾ ਦਾ ਸਾਹਿਬ ਐ ਜਿਨੇ ਸੱਜਾ ਸਾਜੀ ਐ ਉਹਦੀ ਗੱਲ ਐ ਉਹ ਐ ਕੋਈ ਨਹੀਂ ਕਹੇਗਾ अच्छा इने आप नहीं साजे जी श्रेष्ठ शब्द गुरु दी गल है ते जिन्ना साडी असि चांद सूर जी ने बनावे अपना शरीर है बनाया वधो वध ठीक है जी सेवत रहे चित जिन का लागा आया तिन का सफल पयो सेवत रहे चित जिन का लागा जिन्ना दा चित ला गया जिन्ना दा चित शब्द गुरु ਜਿਹਨ ਸੇ ਸਾਂਝੀ ਹੈ ਆਉਣਾ ਸਫਲ ਉਹਨਾਂ ਦਾ ਹੀ ਸੰਸਾਰ ਚਾਉਣਾ ਜਨਮ ਲੈਣਾ ਸਫਲ ਹੈ ਠੀਕ ਹੈ ਜੀ ਤੀਸਰੇ ਪਾਸ ਸਾਡਾ ਹੁਣ ਸ ਸ ਦਾ ਵਿਦੇਸ਼ ਹੈ ਏਕ দান ਤੁਦ ਆ ਤੇਰਾ ਸੰਜਮ ਚਲਿਆ ਗਿਆ ਮੂੜੇ ਮੂਰ ਹੋ ਗਿਆ ਸੰਜਮ ਚਲਿਆ ਗਿਆ ਇੱਕ ਤਾਂ দান ਸੀ ਉਹ ਕੋਟ ਦਾਣ ਲੈ ਲਿਆ ਉਹ ਚੋਲਟ ਮੰਗ ਮੰਗਲੀ ਉਠਾਇਆ ਸੋਹ ਜਿਹਾ ਤਾਂ ਕੋਠਾਇਆ ਦਾਣ ਲੈ ਲਿਆ ਉਹ ਜਿਹੜਾ ਤੇਰੀ ਜਿਹੜੀ ਸੀ ਤੇ ਕਾਲ ਕਮਾਈ ਸਾਰੀ ਜਾਂਦੀ ਨਹੀਂ ਹਰ ਵੇਸਰੇ ਤੇ ਤੇਰੀ ਸਾਈ ਪੁਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਤੇਰਾ ਜਨਮ ਗਿਆ ਸਾਹਿਬ ਪੁੱਤਰੀ ਜਿਹਨਾਂ ਸਾ ਤੇਰੀ ਜਿਤ ਤਾਨ ਖਾਦੇ ਤੇਰੇ ਤੇਰੀ ਹੈ ਉਹ ਤਾਨ ਖਾਦੇ ਤੇਰਾ ਜਨਮ ਗਿਆ ਇਹ ਇਹ ਤਾਂ ਚਲੋ ਹੋ ਗਈ ਸੰਸਾਰੀ ਗੱਲ ਜਿਹੜੀ ਆਤਮਾ ਨੂੰ ਅਸੀਂ ਉਪਦੇਸ਼ ਕਰਦੇ ਹਾਂ ਉਹਨੂੰ ਸਵਰਗ ਲੈ ਕੇ ਵਾਸਤੇ ਉਦੇ ਨਾਲ ਅਸਰ ਜੋ ਸੰਬੰਧ ਹੈ ਇਹ ਗੱਲ ਦਾ ਜਿਆਦਾ ਬਾਹਲੇ ਫੇਰਿਆਂ ਦਾ ਸੰਬੰਧ ਨਹੀਂ ਹੈ ਉਹ ਆਤਮਾ ਬੰਦ ਉਪਦੇਸ਼ ਅਗਰ ਮੱਦਾ ਹੀ ਕਰਦਾ ਫਰਮਾ ਲਿਆ ਤੱਦਾ ਇਹ ਤਾਂ ਖਾਦੇ ਤੇਰਾ ਜਲ ਗਿਆ ਦੀ ਗੋੜੀ ਆਖ ਦੀ ਜਿਹੜੀ ਗੋਲੀ ਬਾਬਾ ਨਖਰੀ ਹੈ ਮਹੱਲਾ ਪੰਜਵਾਂ ਪਵੜੀ ਸਸਾ 77700 7 ਪੁਰਖ ਤੇ ਪਿੰਨ ਨਾ ਕੋ 777 ਸਭ ਸੂ ਹਾਂਜੀ 7 ਪੁਰਖ ਤੇ ਪਿੰਨ ਨਾ ਕੋ ਸਭ ਕੁਝ 77 ਸਰੂਪ ਹੈ ਪੁਰਖ ਤੇ ਪਿੰਨ ਕੋਈ ਵੀ ਨਹੀਂ 7 ਪੁਰਖ ਤੇ ਬਿਨਾ ਕੋਈ ਸਰੀਰ ਨਹੀਂ ਹੈ ਕੋਈ ਜੂਨ ਸੱਚ ਦੇ ਬਿਨਾ ਫਿਰ ਤਾਂ ਸਭ ਮਾਇਆ ਹੀ ਮਾਇਆ ਮਿੱਟੀ ਉਹ ਮਿੱਟੀ ਹੈ ਇਹ ਨਹੀਂ ਹੋ ਸਕਦੀ ਬੋਲ ਸਕਦੀ ਆਤਮ ਸੱਚ ਹੈ ਇਹ ਮਾਇਆ ਵਾਕਿਆ ਮਾਇਆ ਝੂਠ ਹੈ ਹੋਜੀ ਸੋ ਸ਼ਰਨ ਪਰੈ ਜੇ ਪਾਇੰਗ ਸਿਮਰ ਸਿਮਰ ਗੁਣ ਗਾਏ ਸੁਣਾਇੰਗ ਕੋਈ ਸ਼ਰਨ ਪਰੈ ਉਹੀ ਤੇਰੀ ਜਿਹਨੂੰ ਤਾਂ ਪਾਇਆ ਛੜਲੂ ਜਿਹਨੂੰ ਰਾ ਦੱਸਿਆ ਸਿਮਰ ਸਿਮਰ ਗੁਣ ਗਾਏ ਸੁਨਾਇੰਗ ਆਹ ਗੁਣ ਕਾਉਂਦੇ ਰਹਿੰਦੇ ਨੇ ਗੁਣ ਕਾ ਗੁੜੀ ਸਮਾਪਨੇ ਗੁਣਾ ਚ ਸਮਾਜਦੇ ਨੇ ਗੁਣਾ ਦੇ ਸਮੁੰਦਰ ਚ ਸਤਲੋਪ ਹੋ ਜਾਂਦੇ ਨੇ ਇਹ ਸੁਨਾਇੰਗ ਦਾ ਮਤਲਬ ਸੁਣਾਉਣਾ ਨਹੀਂ ਹੈਗਾ ਜੀ ਸੂ ਸ਼ਰਨ ਪਰੈ ਪਰੈ ਵੀ ਆਹ ਕੁਰਬਾਨੀ ਰਚੀ ਦੀ ਸੁਨਾਇ ਰਹੀ ਏ ਸਾਨੂੰ ਵੀ ਆਪਣੇ ਬਾਣੇ ਵਾਲੇ ਪੈਂਦਾ ਹੈ ਆਪਣਾ ਬਾਣਾ ਜਿਹੜਾ ਅੰਦਰਲੇ ਦਾ ਬਾਣਾ ਹੀ ਆਪਣਾ ਬਾਣਾ ਠੀਕ ਹੈ ਸਿਮਰ ਸਿਮਰ ਗੁਣ ਗਾਏ ਸੁਨਾਇੰਗ ਸਿਮਰਦੇ ਰਹੰਨੇ ਨੇ ਸਭੀ ਤੇ ਨੇ ਜੇ ਗੁਣ ਗਾ ਕੇ ਸੁਣਾਵੀ ਦਿੰਦੇ ਨੇ ਸਾਹੀ ਗੁਣ ਗਾ ਕੇ ਸੁਣਾਉਂਦੇ ਸਵਨੋ ਦੇ ਸਵਨ ਤੇ ਬਿਨਾ ਤਾਂ ਸੁਣਾਵਲੀ ਸਕਦੇ ਗੁਣ ਗਾ ਕੇ ਹਾਂਜੀ ਸੰਸੈ ਪਰਮ ਨਹੀਂ ਕੁਛ ਵਿਆਪਤ ਪ੍ਰਗਟ ਪ੍ਰਤਾਪ ਤਾਹੋਂ ਕੋ ਹਾਂ ਸੰਸਾ ਚਿੰਤਾ ਪਰਮ ਨਹੀਂ ਹੈ ਉੱਥੇ ਫਿਰ ਸੰਸਾਰ ਭਰਮ ਨਹੀਂ ਵਿਆਪਤ ਨਾ ਉਹਨਾਂ ਦਾ ਸੰਸਾਰ ਦਾ ਨਾ ਭਰਮ ਬੰਦਾ ਫਿਰ ਪ੍ਰਗਟ ਪ੍ਰਤਾਪ ਤਾਹੁ ਕੋ ਜਾਪਤ ਉਹਨਾਂ ਨੂੰ ਤਾਂ ਉਹਦਾ ਪ੍ਰਤਾਪ ਪ੍ਰਗਟ ਜਾਪਦਾ ਫਿਰ ਸਾਰੇ ਹੁਕਮ ਜਾਪਦਾ ਹੁਕਮ ਹੁਕਮ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਭਗਵਾ ਦੇ ਸਭ ਕੁਝ ਹੋ ਰਿਹਾ ਜਾਪਦਾ ਉਹਨੂੰ ਇਸ ਕਰਕੇ ਹੁਕਮ ਦੇ ਪ੍ਰਤੀ ਸ਼ੰਕਾ ਨਹੀਂ ਰਹਿੰਦਾ ਉਹਨਾਂ ਨੂੰ ਭਰਮ ਨਹੀਂ ਰਹਿੰਦਾ ਤੇ ਭਰਮ ਨਹੀਂ ਰਹਿੰਦਾ ਫਿਰ ਭੈਅ ਨਹੀਂ ਰਹਿੰਦਾ ਉਹਨੂੰ ਠੀਕ ਹੈ ਜੀ ਸੋ ਸਾਧੂ ਇਹ ਪਹੁੰਚਣ ਹਾਰਾ ਨਾਨਕ ਤਾਂ ਕੇ ਸਦ ਬਲਹਾਰਾ ਸੋ ਸਾਧੂ ਉਹ ਸਾਧੂ ਹੈ ਜਿਹੜਾ ਇਸ ਅਵਸਥਾ ਤੇ ਪਹੁੰਚਵੇ ਨਾਨਕਤਾ ਹੈ ਸਦ ਬਲਹਾਰਾ ਨਾਨਕੋ ਤੇ ਬਲਹਾਰਾ ਠੀਕ ਹੈ ਜੀ ਇਹ ਤਾਂ ਤੀਸਰੀ ਪੌੜੀ ਦਾ ਉਪਦੇਸ਼ ਹੈ ਜੀ ਹੁਣ 49ਵੀਂ ਪੌੜੀ ਚ ਉਪਦੇਸ਼ ਫੇਰ ਹੈ ਜੀ ਸਸੇ ਦਾਈ ਪੌੜੀ ਸਸਾ ਸ਼ਰਣ ਪਰੇ ਅਬ ਹਾਰੇ ਸ਼ਾਸਤਰ ਸਿਮਰਤ ਵੇਦ ਪੁਕਾਰੇ ਤਾਂ ਸਾਰ ਸਾਨੂੰ ਪੜੇ ਅਬ ਹਾਰੇ ਹੁਣ ਕਹਿੰਦੇ ਹਾਰ ਕੇ ਸੱਣ ਪੈ ਗਏ ਹਾਰ ਕੇ ਸੱਣ ਕਿਉਂ ਪਏ ਹੋਰ ਕੋਈ ਰਸਤਾ ਹੀ ਨਹੀਂ ਹੈ ਸਾਤਨ ਸਿਮਰਤ ਵੇਦ ਵਿਚਾਰ ਲੈ ਸਾਰੇ ਵਿਚਾਰੇ ਹੋਰ ਕੋਈ ਰਸਤਾ ਨਹੀਂ ਕੋਈ ਰਸਤਾ ਉਹਨਾਂ ਦੇ ਵਿੱਚੋਂ ਵੀ ਇਹੀ ਪੁਕਾਰ ਆਈ ਹੈ ਉਹਨਾਂ ਨੇ ਵੀ ਇਹੀ ਕਿਹਾ ਵੀ ਹੋਰ ਕੋਈ ਰਸਤਾ ਨਹੀਂ ਹੈ ਇਹੀ ਰਸਤਾ ਹੈ ਕੋਈ ਸੋਲਨ ਪੈ ਜਾਣਾ ਹੀ ਰਸਤਾ ਹੈ ਬਾਣੇ ਦੇ ਅਧਿਤ ਹੋ ਜਾਣ ਦੀ ਰਸਤਾ ਹੋਰ ਕੋਈ ਰਸਤਾ ਹੈ ਨਹੀਂ ਠੀਕ ਹੈ ਜੀ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸੋਧਤ ਸੋਧਤ ਸੋਧ ਪਿਆਰਾ ਸੋਧ ਕੇ ਸੋਧ ਕੇ ਸੋਧ ਕੇ ਵਿਚਾਰਿਆ ਇਹ ਹੈ ਹਰ ਦੇ ਨਾਲ ਜੁੜੇ ਬਿਨੋ ਭਜਨ ਦਾ ਮਤਲਬ ਜੁੜੋ ਹਰ ਦੇ ਨਾਲ ਜੁੜੇ ਬਿਨਾ ਆਪਦੇ ਚਰਨ ਚਰਨ ਜੁੜੇ ਬਿਨੋ ਲੱਗੇ ਬਿਨੋ ਇਸ ਕਾਰਨ ਨਹੀਂ ਹੈ ਇਹ ਹਰ ਭਜਨ ਨਹੀਂ ਸੁਟਕਾ ਦਾ ਚਲੋ ਆਰਦੇ ਨਾਲ ਜੋੜੇ ਬਰਨ ਕਾਰਨ ਨਹੀਂ ਹੋ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰੱਥ ਅਗਣਤ ਪਾਰੇ ਇਹ ਪਰਮੈਸ਼ਰ ਜੀ ਅਗਲੇ ਸਾਲ ਭੁੱਲ ਜਾਗੇ ਹਮ ਭੂਲਣ ਹਾਰੇ ਤੁਮ ਸਮਰੱਥ ਅਗਣਤ ਕਿੰਨਾ ਸਮਰੱਥ ਹੈ ਨਹੀਂ ਦੱਸ ਸਕਦੇ ਇਸ ਅਗਣਤ ਸਮਰੱਥ ਹੈ ਜਿੰਨਾ ਸੀ 10 ਵਜੇ ਸਕਦੇ ਇੰਨਾ ਸਮਾਂ ਰੱਖਿਆ ਤੂੰ ਪਰ ਅਪਾਰੇ ਅਪਾਰ ਸਮਰਥਾ ਤੇਰੇ ਵਿੱਚ ਤੇਰੇ ਜੀ ਅਪਾਰ ਬੰਦੀ ਹੈ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਆ ਸ਼ਰਨ ਆਏ ਹੁਣ ਤੂੰ ਰੱਖਿਆ ਕਰ ਰਾਖ ਦਿਆਲਾ ਨਾਨਕ ਤੂੰਰੇ ਬਾਲ ਗੋਪਾਲਾ ਏ ਗੋਪਾਲਾ ਪਰਵਰਿਸ਼ ਕਰਨ ਵਾਲੇ ਸਾਰੀ ਆਤਮਾ ਦੀ ਤੇਰੇ ਬਾਲ ਸੀ ਗੋਪਾਲਨ ਤੂੰ ਰੱਖਿਆ ਕਰ ਸਾਡੀ ਪਾਲਣਾ ਕਰ ਹੋਜੀ ਇੱਕ ਪੌੜੀ ਹੋਰ ਹੈ ਜਿਹਦੇ ਚੋਂ ਕੀ ਫੇਰ ਉਪਦੇਸ਼ ਹੈਗਾ ਇਹ 48ਵੀਂ ਪੌੜੀ ਸੀ ਜੀ ਉਹਨਾਂ 50ਵੀਂ ਪੌੜੀ ਚ ਫੇਰ ਹੈ ਜੀ ਪੌੜੀ ਸਸਾ ਸਿਆਣ ਪਛਾੜਿਆਨਾ ਹਕਮਤ ਹੁਕਮ ਨਾ ਪ੍ਰਭ ਪਤਿਆਨਾ ਔਰ ਆ ਜੇ ਗਿਆਨ ਤੂੰ ਜੁਨਾ ਨਾ ਬਬੂ ਲੈਣਾ ਜਾਗਣਾ ਬਣ ਗਿਆਨ ਪਰ ਜੁਆ ਕਰਦੇ ਉਹਨਾਂ ਨੇ ਸਿਆਣੇ ਬੰਦੇ ਸਿਆਣਪਰੀ ਕਰਦੇ ਹੁੰਦੇ ਗਿਆਨ ਬੋਤੇ ਦੀ ਗਰੀਦੀ ਹੁੰਦੀ ਜਿਕੇ ਆਪ ਤੋ ਸਿਆਣੇ ਨਾਲ ਨੀਹਾਨ ਕਰਦੀ ਸਿੱਖਿਆ ਲਈਦੀ ਹੈ ਗਿਆਨ ਬਛੜਦੇ ਆਣਾ ਹੁਕਮ ਇਕਮਤ ਤੇਰੀ ਆਪਣੀ ਮਤ ਨਾਲ ਤੇਰੇ ਆਪਣੇ ਹੁਕਮ ਦੇ ਹੁੰਦੇ ਆਪਣੀ ਮਰਜੀ ਦੇ ਹੁੰਦੇ ਆ ਉਹ ਪਤੀ ਜਣਾਣੀ ਤੇਰੇ ਤੇ ਪ੍ਰਭੂ ਦੇ ਨਾ ਰੱਪਤੇ ਆਨੋ ਜੇ ਤੈਨੂੰ ਪ੍ਰੋਸਾਟਰਾਂ ਨੂੰ ਜਿੰਨਾ ਚਿਰ ਤੂੰ ਆਪਣੀ ਮਤ ਦਾ ਤਿਆਗ ਨਹੀਂ ਕਰਦਾ ਆਪਣੀ ਮਰਜ਼ੀ ਦਾ ਤਿਆਗ ਨਹੀਂ ਕਰਦਾ ਉਹਨਾਂ ਚਿਰ ਤੇਰੇ ਤੋਂ ਪ੍ਰੋਸਾਹ ਕੀਤਾ ਜਾ ਸਰ ਜੀ ਸਹਿਸਪਾਟ ਕਰੇ ਚਤੁਰਾਈ ਕਰਦਾ ਹਮੇਸ਼ਾ ਹਕੂਮਤੋਂ ਬਚਣ ਦੀ ਗੱਲ ਕਰਦਾ ਆਪਣੀ ਅਕਲ ਨੂੰ ਵੱਡਾ ਬੰਦਾ ਸਹਿਸਪਾਟ ਕਰੇ ਚਤਰਾਈ ਸੰਗ ਪਿਆਰੇ ਜਰੂ ਜਾਈ ਇਤਰਾਈ ਦੇ ਨਾਲ ਨਹੀਂ ਸਾਸ ਨਹੀਂ ਦੇਣਾ ਤੇਰਾ ਇਹ ਸਾਸਰੀ ਦੇਣ ਵਾਲੀ ਕੋਈ ਵੀ ਜਤਰਾਈ ਤੇਰੀ ਇਹ ਤੇੜੀ ਖਾਰੀ ਹੋ ਇਤਰਾਈ ਕਰਕੇ ਤੋਂ ਬੱਜਦੀ ਬਚ ਸਕਦਾ ਤੂੰ ਜਤਰਾਈ ਨਾਲ ਕਰੋ ਤੋਂ ਨਹੀਂ ਜਾ ਸਕਦਾ ਮੌਤ ਤੋਂ ਨਹੀਂ ਬਚ ਸਕਦਾ ساری ਜਤਰਾਈ ਆ ਤੂੰ ਬਚੇ ਨਹੀਂ ਸਕਦਾ ਰੋ ਸੋ ਸੋ ਜੱਪੀ ਦਿਨ ਰਾਤੀ ਰੇ ਜੀ ਸਾਥੀ ਸੋ ਸੋ ਜਪ ਜਪ ਤਾਂ ਲਾਤੀ ਉਹਨੂੰ ਜਪੇਂਦ ਲਾਤ ਜਿਹੜਾ ਤੇਰਾ ਸਾਥ ਦੇਵੇ ਤੇਰੇ ਨਾਲ ਚੱਲੇ ਉਹੀ ਸੱਜਣਾ ਹੈ ਸੱਜਣ ਚਲਦੇ ਨਾਲ ਚੱਲਣ ਉਹਨੂੰ ਜਪੀ ਉਹਨੂੰ ਜਾਣੀ ਉਹਨੂੰ ਜਪੀ ਜਪਦੋਂ ਜਾਣ ਲਈ ਸਮਝ ਲਈ ਉਹਨੂੰ ਸਮਝ ਲਈ ਉਹਦਾ ਸਾਥ ਕਰ ਲੜ ਫੜ ਲਈ ਜਿਹੜਾ ਤੇਰੇ ਚਲਦੇ ਨਾਲ ਚੱਲੂਗਾ ਜਿੰਨੇ ਤੇਰੇ ਨਾਲ ਰਹੇ ਠੀਕ ਹੈ ਸਾਧ ਸੇਵਾ ਲਾਵੇ ਜੇ ਆਪੇ ਨਾਨਕ ਤਾ ਕੋ ਦੁੱਖ ਨਾ ਵਿਆਪੇ ਕੋ ਕੌਣ ਜਿਲ ਨਾਲ ਜਿਹੜੋ ਸਾਧ ਹੁੰਦਾ ਹੀ ਹੈ ਲਾਵੇ ਜੇ ਆਪੇ ਨਾਨਕ ਤਾ ਕੋ ਦੁੱਖ ਦੁੱਖਾ ਵਿਆਪੇ ਅੰਦਰ ਦੁੱਖ ਫਿਰ ਵੱਧਦੇ ਨਹੀਂ ਹਣ ਕਟਣ ਲੱਗ ਜਾਂਦੇ ਨੇ ਦੁੱਖ ਸਾਂਝੇਵਾ ਲੱਗ ਜਵੇ ਸ਼ਬਦ ਵਿਚਾਰ ਜੇ ਲੰਗ ਜਵੇ ਜਿਹਦੇ ਨਾਲ ਸਾਧ ਨੂੰ ਵੱਲ ਮਿਲੇ ਉਹ ਗਿਆਨ ਪ੍ਰਾਪਤ ਕਰ ਲ ਨਗ ਜਵੇ ਜੇ ਬੁੱਧ ਨੂੰ ਵੱਲ ਮਿਲੇ ਫਿਰ ਦੁਖੀ ਵੱਧ ਠੀਕ ਹੈ ਜੀ ਇੱਥੇ ਸੱ ਦਾ ਉਪਦੇਸ਼ ਦੀ ਸਮਾਪਤੀ ਹੈ ਜੀ ਜੀ ਉਪਦੇਸ਼ ਸ੍ਰਿਸ਼ਟੀ ਦੀ ਉਪਾਇਨ ਤੋਂ ਲੈ ਕੇ ਕਿਸ ਤਰ੍ਹਾਂ ਉਹਦੇ ਨਾਲ ਜੁੜਨਾ ਹੈ ਕਿਹੜੀ ਸਿਆਣਪ ਛੱਡਣੀ ਹੈ ਤੇ ਸਾਰਾ ਆਪਾਂ ਨੂੰ ਦਰਸਾਇਆ ਹੈ